ਸ਼ਲੋਕ ਡੱਖਣੇ ਮਹੱਲਾ ਪੰਜਵਾਂ ਸੈ ਨੰਗੇ ਨਹ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪੀਰੀ ਪਖੰਡੋ ਸੁਭ ਦਿਸ਼ਟ ਫਿਰ ਦੇ ਨਾ ਉਹ ਨਾ ਜਦਿਆਂ ਭੁੱਖਿਆਂ ਨੂੰ ਦੇਖ ਕੇ ਆਪ ਆਪ ਨੂੰ ਭੁੱਖ ਨਹੀਂ ਪੈਦਾ ਹੁੰਦੀ ਜਿਹਨਾਂ ਨੂੰ ਆਇਆ ਦੀ ਭੁੱਖਾ ਨੂੰ ਦੇਖ ਕੇ ਉਹਨਾਂ ਨੂੰ ਆਇਆ ਦੀ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਲੱਗੇ ਨਹੀਂ ਕਹਿ ਸਕਦੇ ਉਹਨਾਂ ਦਾ ਸੱਚ ਪਹਿਦਿਆਂ ਹੋਇਆ ਹੈ ਹੈ ਲੱਗੇ ਉਹ ਨਹੀਂ ਲੱਗੇ ਉਹ ਸੱਚ ਦੇ ਸਹਾਰ ਨੇ ਜਦੋਂ ਭੁੱਖੇ ਲੱਖ ਜਦੋਂ ਲੋੜ ਭੁੱਖਿਆਂ ਨੂੰ ਦੇਖਦੇ ਨੇ ਨਾ ਭੁੱਖਿਆਂ ਕਹਿੰਦੀ ਬਲ ਨੂੰ ਦੇਖ ਕੇ ਬਲ ਨਹੀਂ ਬਣਦੇ ਸਭ ਤਾਂ ਖਾਲੇ ਸਲਪੀ ਕੋਟਕ ਮਿਲਣਾ ਸੰਤ ਦੰਗੇ ਭੁੱਖਿਆਂ ਨੂੰ ਦੇਖ ਕੇ ਆਪਣੇ ਅੰਦਰ ਕੋਖਰੀ ਭਾਇਆ ਦੀ ਪੈਦਾ ਕਰਦੇ ਉਹਨਾਂ ਦੀ ਰੀਸ ਨਹੀਂ ਕਰਦੇ ਉਹਨਾਂ ਦੀ ਅਨੁਸਾਰ ਨਹੀਂ ਉਹਨਾਂ ਦਾ ਕਰਦੇ ਉਹ ਗੁਰ ਚਾਲੀ ਚੱਲਦੇ ਸੀ ਉਹ ਦੰਗੇ ਭੁੱਖਿਆਂ ਦੀ ਚਾਲ ਉਹ ਸਾਜ਼ੀ ਚਾਲੀ ਦੀ ਚੱਲਦੇ ਹੁਣ ਚਾਲ ਨਾ ਕਹੋਗਾ ਕਦਵੇਂ ਨਹੀਂ ਮਿਲਦਾ ਪੰਕਟਾ ਤੇ ਸੰਸਾਰੀਏ ਜੋੜ ਕਦੇ ਲਾਇਆ ਸਾਰਿਆਂ ਨੂੰ ਦੇਖ ਕੇ ਉਹਨਾਂ ਦੇ ਅੰਦਰ ਭੁੱਖ ਨਹੀਂ ਪੈਦਾ ਹੁੰਦੀ ਮਾਈ ਦੌੜ ਚ नहीं ਫਿਰਦੇ ਸੰਤਾਂ ਤੋਂ ਬੜਬੜੇ ਕਰੋੜਾਂ ਰੁਪਏ ਦੀਆਂ ਗੱਡੀਆਂ ਉਹਦੀ ਖਰੀਦਦੇ ਹਾਂਜੀ ਦੁੱਖੇ ਕੋੜ ਨਾ ਦੁੱਖ ਨਾਨਕ ਪੀਰੀ ਪਖੰਡੋ ਸੁਭ ਵਿਸ਼ਟ ਕਰੋੜਾਂ ਦੁੱਖਾਂ ਦੇ ਵਿੱਚ ਬੈਠੇ ਹੋਏ ਵੀ ਘਰੇ ਹੋਏ ਵੀ ਦੁੱਖ ਨੂੰ ਦੁੱਖ ਨਹੀਂ ਬੰਦੇ ਹੋ ਉਤਲੇ ਸ਼ਲੋਕ ਦਾ ਰਿਜ਼ਲਟ ਆਉਣ ਵਾਲਾ ਕੀ ਸੀ ਇਹ ਥੱਲੇ ਲਿਖ ਦਿੱਤਾ। ਜੀ ਜੋ ਉੱਤੇ ਲਿਖ ਦਿੱਤਾ ਉਹਦਾ ਰਿਐਕਸ਼ਨ ਜਿਹੜਾ ਹੁਣ ਕੋਲ ਕਰੋੜਾਂ ਹੀ ਦੁੱਖ ਆ ਜਾਣ ਚਾਹੀਏ। ਲਾ ਵਾਸਤੇ ਦੁੱਖ ਨਹੀਂ ਹੁੰਦਾ ਹੋ। ਨਾਨਕ ਪਰੀ ਪਖੰਦੋ। ਸ਼ੁਭ ਦ੍ਰਿਸ਼ਟਿ ਕਿਉਂਕਿ ਉਹਨਾਂ ਦੇ ਉੱਤੇ ਪਰਮੇਸ਼ਰ ਦੀ ਸ਼ੁਭ ਦ੍ਰਿਸ਼ਟੀ ਹੁੰਦੀ ਹੈ। ਉਹਨਾਂ ਨੂੰ ਦੁੱਖ ਲੱਗਦਾ ਹੀ ਨਹੀਂ। ਪਰੀ ਪਖੰਦੋ ਤੋਂ ਕੀ ਭਾਵਨ ਜabb ਫਿਰ ਦੇਖਦਾ ਹੈ ਉਹਨਾਂ ਨੂੰ ਸ਼ੁਭ ਦ੍ਰਿਸ਼ਟੀ ਨਾਲ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ ਹਰ ਪਰ ਸਭਰ ਕਿਰਪਾ ਹੈ ਪ੍ਰਭ ਤੇਰੀ ਤੇ ਥੋੜੀ ਜਿਹੀ ਤੇ ਪਰ ਹੈ ਕਹੇਰੀ ਪਰਮੇਸ਼ਰ ਦਾ ਸ਼ੁਭ ਦ੍ਰਿਸ਼ਟੀ ਨਾਲ ਦੇਖਦਾ ਹੈ ਉਹਨਾਂ ਵੱਲ ਉਹਨਾਂ ਨੂੰ ਤਾਂ ਨਹੀਂ ਦੁੱਖ ਲੱਗਦਾ ਠੀਕ ਹੈ ਜੀ ਉਹ ਮਸਤ ਹੋਏ ਹੋਏ ਆ ਕਿ ਉਹਨਾਂ ਨੂੰ ਇੱਥੇ ਦੁੱਖ ਭਾਸ ਦੇ ਨਹੀਂ ਰਾਜਾ ਰਾਮ ਆਇਆ ਫੇਰੀ ਆਇਆ ਹੀ ਹੈ ਨਾ ਮਾਇਆ ਨੂੰ ਜਬਰ ਜੀ ਵੇਰਦ ਹੋਏ ਮਾਇਆ ਕਰੇ ਦੁੱਖ ਹੈ ਹੋ ਜੀ ਦੁੱਖ ਸਮੂਹਾ ਭੋਗ ਤੁਮ ਦਾ ਛਕ ਤੁਮ ਸਾਰੇ ਹੀ ਸੋ ਕੋਣ ਦੂਏ ਪਾਸੇ ਉਧਰੇ ਪਾਸੇ ਦੁੱਖ ਹੈ ਜੀ ਗੁਰ ਗੁਰੂ ਕੋ ਭੋਗ ਸਬਾਈ ਕੋ ਤਨੀ ਸਾਰੀ ਭੋਗੀ ਦੇ ਪਦਾਰਥਾਂ ਦਾ ਮਾਲਕ ਹੋਵੇ ਕੋਈ ਚਾਹੇ ਜਿੱਦੀ ਤਰਕੀ ਤੇ ਪਦਾਰਥ ਦੇ ਇਹਦਾ ਅੰਦਾਜ਼ਾ ਮਾਲਕ ਹੋਵੇ ਉਹ ਪਦਾਰਥ ਨੇ ਸਾਰੇ ਖਾਣ ਵਾਲੀਆਂ ਚੀਜ਼ਾਂ ਉਹ ਖਾਣ ਵਾਲੀਆਂ ਚੀਜ਼ਾਂ ਦਾ ਮਾਲਕ ਵੀ ਹੋਵੇ ਨਾਲ ਕਾਪੋ ਰੋਗ ਨਾ ਕਹਿੰਦਾ ਇਹ ਤਾਂ ਸਭ ਰੋਗ ਹੈ ਵਿਰਤ ਕਾ ਹੋ ਨੋ ਬਿੜੀ ਨੋ ਬਿੜਿਆ ਜਿਉਂਦਾ ਨਾ ਮਨੂ ਉਹ ਵਿਰਤ ਬਿਰਤਕ ਪਿੰਡ ਨਾਲ ਜੁੜਿਆ ਹੋਇਆ ਹੈ ਆ ਸਰੀਰ ਬਿਰਤਕ ਹੈ ਦੇ ਹੀ ਬਾਹਰ ਨਹੀਂ ਸਮਝਦਾ ਉਹ ਤਾਂ ਬਿਰਤਕ ਹੈ ਇਹਦਾ ਨੋ ਵੀ ਬਿਰਤਕ ਪਿੰਡ ਹੈ ਪਿੰਡ ਨਾਲ ਜੁੜਿਆ ਹੋਇਆ ਜਾਣਦਾ ਆਤਮਾ ਤਾਂ ਆਪਣੇ ਆਪ ਨੂੰ ਗੁੱਦਦਾ ਹੀ ਨਹੀਂ ਹੈ ਹਾਂਜੀ ਮਹੱਲਾ ਪੰਜਵਾਂ ਇੱਕ ਸਕੂਤੂ ਆਹੇ ਪਛਾਣੂ ਬੀ ਹਿੱਕ ਕਰ ਨਾਨਕ ਆਸੜੀ ਨਿਵਾਹੇ ਮਾਨੁਖ ਪਰਥਾਈ ਲ ਜੀਵ ਦੋ ਓਏ ਕੋਹੋਂ ਤਾਂ ਏਕਤਾ ਵਾਸਤੇ ਤੂੰ ਆਇਆ ਵਾਸਤੇ ਸਭ ਨਾਲ ਏਕਤਾ ਕੈਂਪ ਕਰਨ ਵਾਸਤੇ ਸਭ ਨੂੰ ਗਿੱਤਰ ਬਣਾਉਣ ਵਾਸਤੇ ਪਹਿਲਾਂ ਆਪਣੇ ਅੰਦਰਲੀ ਦੁੱਖ ਦਾ ਦੂਰ ਕਰ ਫਿਰ ਦੂਜਿਆਂ ਨਾਲ ਜਿਹੜੀ ਹੈ ਤੇਰੀ ਬੀਤ ਬੀਤ ਦੇਖਣਗੇ ਕੋਈ ਤੈਨੂੰ ਦੁਸ਼ਮਣ ਨਹੀਂ ਦਿਖੂਗਾ ਕੋਈ ਬੈਰੀ ਨਹੀਂ ਦਿਖੂ ਕੋਈ ਬਗਾਨਾ ਨਹੀਂ ਦਿਖੂ ਆਏ ਪਛਾਣੋ ਵੀ ਵੇ ਇੱਕ ਦੀ ਪਛਾਣ ਵੀ ਕਰਨਾ ਇੱਕ ਹੁੰਦਾ ਕੀ ਹੈ ਉਹਦੀ ਪਛਾਣ ਵੀ ਕਰ ਤੇ ਕੌਣ ਆਇਆ ਇੱਕ ਦੀ ਪਹਿਲਾਂ ਪਛਾਣ ਕਰ ਕੀ ਹੁੰਦਾ ਫਿਰ ਉਹ ਜਾ ਬਣ ਨਾਨਕ ਅਸਲੀ ਨਿਵਾਹੀ ਮਾਨੁੱਖ ਪਰਥਾਈ ਆਸਲੀ ਨੇ ਵਾਹੀ ਜਿਹੜੀ ਤਾਂ ਆਸ ਲੈ ਕੇ ਆਇਆ ਸੀ ਉਹ ਆਸਲੀ ਦਾ ਦਵਾ ਘਰੋ ਦੇ ਜਿਹੜੇ ਬੋਲੂ ਕਦੇ ਪਰਥਾਈ ਸਦਾ ਬੋਲੂ ਦੀ ਟੇਕ ਤਾਂ ਲੈਂਦੇ ਨੇ ਵੀ ਇੱਕ ਆਹੀ ਮੇਰਾ ਗੁਰੂ ਹੈ ਨਾਲ ਮੈਂ ਜੁੜ ਗਿਆ ਬਸ ਉਹਨਾਂ ਨੂੰ ਆਸ਼ਰਬੁੱਧਗੀ ਦਾ ਹੀ ਉਹ ਦੇਖਣਾ ਪੈਂਦਾ ਉਹ ਸ਼ਰਬੁੱਧਾ ਹੀ ਹੋਏ ਨੇ ਦਰਗਾਹ ਜਾ ਕੇ ਆਪਣੇ ਆਪ ਨੂੰ ਦੀ ਜੁੜੇ ਬਾਹਰ ਜੁੜ ਗਏ ਕਿਸੇ ਨਾਲ ਠੀਕ ਹੈ ਜੀ ਇਹ ਸੰਪਰਦਾਵਾਦ ਨੂੰ ਵੱਲ ਇਸ਼ਾਰਾ ਹੈ ਜੀ ਹਾਂ ਜੀ ਹਾਂ ਜਿੱਲੇ ਵੀ ਬਾਹਰ ਜੁੜੇ ਨੇ ਆਦਮੀ ਦੇ ਜੁੜੇ ਠੀਕ ਹੈ ਚਾਹੇ ਕੋਈ ਸੰਤ ਨਾਲ ਚਾਹੇ ਕਿਸੇ ਕੋਈ ਸੰਸਥਾ ਨਾਲ ਕਿਸੇ ਨਾਲ ਜੁੜਿਆ ਇਹਨਾਂ ਉਹਨਾਂ ਨੂੰ ਅੱਗੇ ਜਾ ਕੇ ਲੱਜਾ ਉਠਾਉਣੀ ਪੈਗੀ ਹੈ ਜੀ ਭਗਤਾਂ ਦੇ ਗੁਰੂਆਂ ਨਾਲ ਆਪਣੇ ਆਪ ਨਾਲ ਕਿਸੇ ਨੂੰ ਜੁੜਿਆ ਉਹਨਾਂ ਨੇ ਉਹਨੂੰ ਉਹਦੇ ਮੋਢੇ ਨਾਲ ਜੋੜਿਆ ਇਆ ਫਿਰ ਸ਼ਬਦ ਗੁਰੂ ਨਾਲ ਜੋੜਿਆ ਪਰਮੇਸ਼ਰ ਉਹ ਫਿਰ ਬਾਅਦ ਦੀ ਗੱਲ ਹੈ ਸ਼ਬਦ ਗੁਰੂ ਨਾਲ ਜਾਂਦਾ ਉਹ ਤਾਂ ਗੁਰਬਾਣੀ ਤਾਂ ਉਹਦੇ ਨਾਲ ਜੋੜਦੀ ਹੈ ਅਪਣੇ ਬੂਲ ਪਿਛਲ ਬੰਤੂ ਜੋ ਸਰੂਪ ਹੈ ਬਸ ਠੀਕ ਹੈ ਜੀ ਅੱਗੇ ਜਾ ਕੇ ਨਹੀਂ ਤਾਂ ਲੱਜਾ ਉਠਾਉਣੀ ਪੈਗੀ ਹਾਂ ਜੀ ਹਾਂ ਸਰਬੰਦੀ ਕੀ ਲਾਭ ਨੂੰ ਉੱਥੇ ਜਾ ਕੇ ਠੀਕ ਸਰੂਤਾ ਹੋਣਾ ਪਊ ਸਾਹਿਬ ਕੇ ਦਰਵਾਜ਼ੇ ਆਖੇ ਬੁਢੀਵਾਂ ਗੱਲ ਨਾ ਏਕ ਨਾਰਾਇਣੋ ਹਰ ਅਗਮ ਅਗਾਧਾ ਨਹਿਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਦੇਖਿਆ ਲਗੀਆ ਏਕ ਨਾਮ ਏਕ ਧਾਰਣੂ ਜਿਹੜਾ ਅਨਿਚਲੜੋਲ ਹੈ ਹਰ ਰਾਮਾ ਗਾਤਾ ਉਹ ਨਾਰਾਇਣੂ ਕੀਆ ਉਹ ਹਰ ਹੈ ਜੀਦੇ ਸਭ ਤੋਂ ਹਰਾ ਪਰ ਆਗਮ ਉਹ ਬੁੱਧੀ ਤੇ ਪੁਰੇ ਬੁੱਧੀ ਤੋਂ ਪਰੇ ਆਗਮ ਆਗਮ ਹੁੰਦਾ ਜਿੱਤੇ ਅਸੀਂ ਪਹੁੰਚ ਨਹੀਂ ਸਕਦੇ ਕਿਸੇ ਵੀ ਸਾਧਨ ਤੋਂ ਬੁੱਧੀ ਬੋਧਕ ਲੈਵਲ ਤੇ ਆ ਆਗਾਧਾ ਬੋਧ ਤੋਂ ਪਰੇ ਸੰਸਾਰੀ ਬੋਧ ਬੁੱਧੀ ਹੈ ਲੇਕਿਨ ਨਾਉ ਨਿਧਾਨ ਹੈ ਜਾਂ ਫਿਰ ਨਾਮ ਨਿਧਾਨ ਵਿੱਚ ਜਿਸ ਸਿਬਰਤ ਫਰ ਜਿਹਦੇ ਸਿਬਰ ਨਾਲ ਜਿਹੜਾ चेता ਔਲ ਨਾਲ ਜਿਹੜਾ ਹਿਰਦੇ ਵਿੱਚ ਔਲ ਨਾਲ ਜਿਹਦੀ ਸਾਹ ਜ ਔਲ ਨਾਲ ਤਾਂ ਹਰ ਜਿਹੜਾ ਸੀ ਆਪਣਾ ਬੂੜ ਮਿਲ ਗਿਆ ਆਪਣੇ ਬੂੜ ਨਾਲ ਜੁੜ ਗਿਆ ਲਾਡਾ ਪ੍ਰਾਪਤ ਕਰ ਲਿਆ ਸੋ ਜੀ ਮੇਹ ਚਲ ਕੀਰਤਨ ਗੁਣ ਗੋਬਿੰਦ ਕੌਣ ਕਹਾ ਹੈ ਨਾ ਜਿਹੜਾ ਗੋਬਿੰਦ ਤੇ ਕੌਣ ਦੇ ਕੀਤਾ ਜਿਹੜਾ ਗੁਰਮੁਖੀ ਨਹੀਂ ਗਿਆ ਗੁਰਬਾਣੀ ਕਾ ਵਾਦਾ ਜਿਹੜਾ ਗੁਰਮੁਖ ਤੋਂ ਦੇ ਗਾਇਆ ਦੀ ਗੁਰਮੁਖ ਖਤੇ ਗਵਾਇਆ ਗਿਆ ਹੈ ਕਾ ਵਾਦਾ ਕਾਇਆ ਦੀ ਗਵਾਇਆ ਗਿਆ ਇਹ ਦੇਖ ਲੈ ਫਿਰ ਬਾਣੀ ਦੇਖ ਲਈ ਹੈ ਇੱਕ ਵਾਰ ਘੱਟ ਨਹੀਂ ਹੋ ਸਕਦੀ ਤਾਂ ਸਿਰ ਤੇ ਨਾ ਗੱਲਾਂ ਚੇਹੇ ਦੀ ਹੋ ਰੁ ਕੋਈ ਤਰਬੀਬ ਨਹੀਂ ਹੋ ਸਕਦੀ ਅੱਜ ਵੀ ਸੱਚ ਹੈ ਕੱਲ ਨੂੰ ਵੀ ਸੱਚ ਹੈ ਪਿੱਛੇ ਵੀ ਸੱਚ ਸੀ ਘਰ ਵੀ ਸੱਚ ਰਹੂਗਾ ਸੱਚ ਦੇ ਚਲੇ ਹੁੰਦੇ ਸੱਚ ਧਰਬ ਤਪ ਦੇ ਚਲੋ ਜਿਹੜਾ ਸੱਚ ਧਰਬ ਹੋਵੇ ਲੋ ਤਾਪ ਜਿਹੜਾ ਤਪ ਉੱਤੇ ਲਾਗੂ ਕਰਨੋ ਤਾਪੈ ਸੱਚ ਧਰਬ ਨੂੰ ਗੁਰਬਾਣੀ ਦੇ ਗਿਆਨ ਨੂੰ ਗੁਰਬਾਣੀ ਨੂੰ ਮੰਨ ਦੇ ਉੱਤੇ ਲਾਗੂ ਕਰਨੋ ਜਿਹੜਾ ਹੈਗਾ ਬੁੱਧੀ ਲਾਗੂ ਕਰੇ ਇਹ ਤਪ ਹੈ ਤਪ ਇਹ ਦੇ ਇਹ ਦੇ ਚਲੇ ਫਿਰ ਬੁੱਲ ਸੱਚタルਬ ਤਾਬੂ ਦੇਚਲੋ ਸੱਚタルਬ ਤਾਬੂ ਦੇਚਲ ਕਰਨ ਵਾਲਾ ਹੈ ਬੋਲੂ ਟਕਾਉਣ ਵਾਲਾ ਹੈ ਜਿਹੜੇ ਰਹਿਣ ਅਰਾਧਾ ਜਿਹੜੇ ਦਿਨ ਰਹਿਣ ਨੇ ਉਹਨਾਂ ਨੂੰ ਅਡੋਲਤਾ ਦੀ ਪ੍ਰਾਪਤੀ ਵੀ ਹੁੰਦੀ ਹੈ ਫੇਰ ਇਹ ਸੱਚタルਬ ਦੇਚਲ ਕਰਦਾ ਹੈ ਮੈਦੀ ਕਰਦਾ ਪਾਠ ਕਰ ਲੈਂਦੇ ਤੇ ਨਿਤਨੇਮ ਕਰੇ ਤੇਰੀ ਕਰਦਾ ਹੈਗਾ ਜਿਹੜੇ ਰਹਿਣ ਅਰਾਧਾ ਜਨ ਰਹਿਣ ਅਰਾਧਾ ਦੀ ਸ਼ਰਤ ਹੈ ਹੋਜੀ दया धर्म तप नेह चलो जिस कर्मी लिखादा नेह चल मस्तक लेख लिखिया सो तले ना तलादा दया धर्म तप नेह चलो दया धर्म तप नेह चल केड़े दे जिस कर्म लिखाता ਆ ਜਿਹੜਾ ਲਿਖਿਆ ਹੋਇਆ ਨਾ ਮੇਰੀ ਪੜੀਆਂ ਲਿਖਦੇ ਸ੍ਰੀ ਗੋਪਾਲ ਉਹਨੇ ਆਪ ਨਹੀਂ ਲਿਖੀ ਆਪਣੀ ਫੱਟੀ ਲਿਖਾਇਆ ਗੁਰਬਾਣੀ ਤੋਂ ਪੁੱਛਿਆ ਗੁਰੂ ਤੋਂ ਪੁੱਛਿਆ ਮੈਂ ਕੀ ਕਰਾਂ ਕੀ ਨਾ ਕਰਾਂ ਇਹ ਲਿਖਾਇਆ ਅੰਦਰ ਉਹ ਬਦੇ ਜੋ ਗੁਰਬਾਣੀ ਕਹਿੰਦੀ ਆ ਉਹਨੂੰ ਮੰਨਣਾ ਲਿਖਾਇਆ ਜਿਹੜਾ ਆਪ ਬੰਦ ਕੇ ਦਿਆ ਬਿਆ ਦਿਆ ਧਰਮ ਆਪ ਬੋਲਿਆ ਬਿਆ ਧਰਮ ਉਹਦੇ ਚੱਲਦੀ ਕਰਦਾ ਬੋਲੂ ਕੋਲੂ ਨਹੀਂ ਟਿਕਾ ਸਕਦਾ ਵੱਲੋਂ ਉਹ ਦਿਆ ਦਿਆ ਕੀ ਹੈ ਉਹ ਦਿਆ ਇਹਦੇ ਅੱਜ ਫਰਕ ਕੀ ਹੈ ਦਿਆ ਜਾਣੇ ਜੀ ਕੀ ਕੁਝ ਪਰਦਾਨ ਕਰੇ ਜੀ ਦੇ ਉੱਤੇ ਦਿਆ ਕਰਦੀ ਹੈ ਅਸੀਂ ਸਰੀਰ ਤੇ ਦਿਆ ਕਰਦੇ ਨਾ ਫੈਰੀ ਜੁੱਤੀ ਨਹੀਂ ਜੁੱਤੀ ਲੈਤੀ ਸਰੀਰ ਨੂੰ ਫਾਇਦਾ ਹੋਇਆ ਸਰੀਰ ਨੂੰ ਆਰਾਮ ਮਿਲਿਆ ਆਤਮਾ ਆਰਾਮ ਨਹੀਂ ਮਿਲਿਆ ਕੱਪੜਾ ਦੇਤਾ ਰੋਟੀ ਦੇਤੀ ਇਹ ਸਭ ਜੀ ਦੀ ਦਿਆ ਲਈ ਹੈ ਇਹ ਜਨ ਤੋਂ ਤੇ ਦਿਆ ਸਰੀਰ ਉੱਤੇ ਦਿਆ ਬਸ ਇਹ ਇਹ ਜੀਦੀ ਦੇ ਆ ਕੀ ਹੈ ਉਹਦਾ ਜੰਦੂ ਬੋਲ ਕੱਟਣਾ ਸੱਚ ਦਾ ਗਿਆਨ ਦੇਣਾ ਉਹਦੇ ਮਨ ਨੂੰ ਅਡੋਲ ਕਰਨ ਉਹਦੀਆਂ ਚਿੰਤਾਵਾਂ ਦੀ ਤੋਂ ਮੁਕਤ ਕਰ ਦੇਣਾ ਇਹ ਜੀਦੀ ਸਾਡੇ ਤਪ ਧਰਮ ਦਇਆ ਵੱਖਰੀ ਹੈ ਉਹਨਾਂ ਦੇ ਤਪ ਤਰੁ ਦਇਆ ਵੱਖਰੀ ਹੈ ਤਾਂਾਂ ਦੇ ਕਰਦਾ ਉਹ ਜਿਹੜੇ ਪਿੱਛੇ ਡੱਬ ਕੀਤੇ ਨੇ ਤਰੁ ਤਾਂ ਉਹਨਾਂ ਚ ਇਹ ਨਹੀਂ ਹੈ ਇਹ ਮਤਲ ਅਡੋਲ ਕਰਨ ਵਾਲੀਆਂ ਉਹ ਜਿਹੜੀਆਂ ਦਸੀਆਂ ਨੇ ਉਦਰੀ ਅਡੋਲ ਕਰਨ ਵਾਲੀ ਉਹ ਚਲਾਏ ਬਣਾ ਰੱਖਣਗੇ ਤੁਹਾਨੂੰ ਇਹ ਬੰਦੋ ਟਕਾਉਣਗੇ ਉਹ ਤੇ ਬੰਦ ਨਹੀਂ ਟਕਾਉਣਗੇ ਰਹੂਗਾ ਇੱਥੇ ਉਹਨਾਂ ਜੇ ਗੱਲ ਨੰਬ ਕੀਤੀਆਂ ਨੇ ਤਾਂ ਅਡੋਲ ਵਾਲੀ ਬਤਮੀ ਦੱਸੀਏ ਤੁਹਾਨੂੰ ਹਾਂਜੀ ਨਹਿਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਹੁਕਮ ਕਰਤਾ ਉਹ ਅਡਲ ਕਿਤੇ ਤੇ ਵੀ ਹੁਕਮਾਂ ਕੋਮੋੜੇ ਚੱਲਦਾ ਸਾਨੂੰ ਪਲੇਖਾ ਵੀ ਸਾਡਾ ਚੱਲਦਾ ਚਲ ਲੇਖ ਲਿਖਿਆ ਤੋਂ ਕੀ ਕਰ ਸਕਦਾ ਹੈ ਅੱਜ ਵੀ ਕੁਝ ਨਹੀਂ ਕਰ ਸਕਦਾ ਕਹਿੰਦਾ ਇਹ ਕਰ ਦੂੰ ਗੁਰੂ ਇਹ ਰੂਹਾ ਕੁਤਰਬਾਨ ਬਣਾ ਦੂੰ ਮੈਦੂਰੀ ਨੂੰ ਸਿੱਖ ਬਣਾ ਦੂੰ ਪੱਛੇ ਨਹੀਂ ਕਰ ਸਕਦਾ ਉਹਦੀ ਰਾਜਾ ਚ ਹੁੰਦਾ ਜੋ ਹੁੰਦਾ ਹੋ ਜੀ ਸੰਗਤ ਸਾਧ ਜਨ ਬਚਨ ਨਿਚਲ ਗੁਰ ਜਿਨ ਕੋ ਪੂਰਵ ਲਿਖਿਆ ਤਿੰ ਸਦਾ ਸਦਾ ਆਰਾਧਾ ਵਿਚਲ ਸੰਗਤ ਸਾਚ ਜਨ ਜਨ ਦੀ ਸੰਦਰ ਦੇ ਵਿਚਲ ਇਹ ਜੇ ਸਾਚ ਜਨ ਜਨ ਦੇ ਗੁਰੂ ਘਰ ਦੇ ਟਿਕਾ ਆਇਆ ਬਹੁਤਿਆਂ ਨੂੰ ਆਇਆ ਕਿੰਨੀਆਂ ਭਗਤਾਂ ਦੀ ਆਪਣੇ ਪਠਾਂ ਦੀ ਬਾਣੀ ਦੇਚਲ ਹੋਏ ਸੰਗਤ ਵਿੱਚ ਆ ਕੇ ਹੋਏ ਨੇ ਇੱਕ ਉਹ ਤਦ ਤੱਕ ਗੁਰ ਸੰਗਤ ਕੇਮਲ ਅੱਜ ਤੋਂ ਤਰਾਸ ਗਟਾਈ ਇੱਕ ਅਰਦਾਸ ਤੋਂ ਆਖੀ ਜੀਰੋ ਦੀ ਪਹਿਲਾਂ ਬੁੱਧੀ ਕੈਤੇ ਰਹੇ ਨੇ ਨਾ ਟਾਰਗੇਟ ਬਣਨਾ ਹੈ ਚਾਰੇ ਪਦਾਰਥਾਂ ਦਾ ਔਰ ਬਿਲਕੁਲ ਟਸਟੇ ਮਸਦੀ ਹੋਏ ਸਿੱਧ ਚਲੇਗਾ ਇਹ ਆਪਣੇ ਦਿਸਾਨੇ ਵੱਲ ਉਹਨਾਂ ਦੀ ਸਦਾ ਸਦਾ ਹਾਰ ਫਿਰ ਪਹਿਲਾਂ ਹੀ ਲਿਖ ਲਿਆ ਸੀ ਵੀ ਚਾਰੇ ਪਦਾਰਥ ਲੈਣੇ ਨੇ ਲੈਣਾ ਹੀ ਲੈਣਾ ਨੇ ਮਾਇਆ ਦੀ ਪ੍ਰਵਾਹ ਕਰਦੀ ਹੁੰਦੀ ਹੈ ਬਸ ਅਡੋਲੇ ਰਹੇ ਰਹੇ ਹੋ ਕੇ ਰੋਲ ਚੱਲਦੇ ਗਏ ਸਦਾ ਸਦਾ ਆਰਾਧਨਾ ਦੇ ਵਿੱਚ ਵਸਤੂ ਗੋਲੀਆਂ ਗੋਲੀਆਂ ਇੱਥੇ 19ਵੀਂ ਪੌੜੀ ਦੀ ਸਮਾਪਤੀ ਹੈ ਜੀ